ਸੰਸਦ ਵਜਨ ਸਿੰਘ ਜੀ ਦਾ ਬਹੁਤ ਹੀ ਰੇਣੀ ਅਤੇਰ ਮਾਦੀ ਹਾਂ ਕਿਉਂਕਿ ਬਹੁਤ ਸ਼ਾਰਟ ਟਾਈਮ ਚ ਇਹਨਾਂ ਨੇ ਬਹੁਤ ਕੁਝ ਦੱਸਿਆ ਹੈ ਹੁਣ ਕਿਉਂਕਿ ਆ ਜੋ ਬੱਚਾ ਨੇ ਯੂਥ ਇਹ ਸਾਡਾ ਆਪਣਾ ਕੀਤਾ ਕੰਮ ਨਹੀਂ ਸਾਡੇ ਯੂਥ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਸਮਝਦੇ ਹਾਂ ਪਰ ਉਸ ਤੋਂ ਪਹਿਲਾਂ ਧੰਨਵਾਦ ਅਸੀਂ ਮਾਲਾ ਨਾ ਕਰਨਾ ਹੈ ਪਰ ਉਸ ਤੋਂ ਪਹਿਲਾਂ ਕਿਉਂਕਿ ਮਾਲਾ ਦਾ ਜੋ ਮਹੱਤਵ ਹੈ ਉਹ ਮੈਂ ਚਾਹਨਾ ਕਿ ਥੋੜਾ ਜਿਹਾ ਉਹ ਬੱਚਿਆਂ ਨੂੰ ਵੀ ਪਤਾ ਲੱਗੇ ਔਰ ਸਾਧ ਸੰਗਤ ਜੀ ਇੱਕ ਵਾਰੀ ਫੇਰ ਦੁਹਰਾਇਆ ਜਾਵੇ ਸਿਰਫ 5 ਮਿੰਟ ਲਈ ਮੈਂ ਸੰਤ ਸੁਖਪਾਲ ਸਿੰਘ ਜੀ ਪਾਸ ਬੇਨਤੀ ਕਰਾਂਗਾ ਕਿ ਆ ਕੇ ਸਟੇਜ ਤੇ ਥੋੜਾ ਜਿਹਾ ਦੱਸਣ ਪਰਮ ਸਤ ਕਾਇਓ ਸੱਚੇ ਪਾਸ਼ਾ ਸਵਾਜੀ ਨਵਾਜੀ ਸਾਧ ਸੰਗਤ ਸਾਰੇ ਇੱਕ ਵਾਰੀ ਮਨ ਬਿਤੀ ਨੇ ਕਾਰ ਕਰੀਏ ਰਸਨਾ ਪੁਇਤਰ ਕਰੀਏ ਗੱਜ ਕੇ ਆਖੇ ਤਾਨਸਰੀ ਸਗੂ ਜਗਜੀਤ ਸਿੰਘ ਸੱਚੇ ਪਾਸ਼ਾ ਇਹ ਜੋ ਕੁਝ ਸਾਰਾ ਕੁਸ਼ ਆਪ ਦੇਖ ਰਹੇ ਹੋ ਉਹ ਦੀ ਕਿਰਪਾ ਹੈ ਤੇ ਜਿਆਦਾ ਟਾਈਮ ਨਹੀਂ ਲੈਣਾ ਇੱਥੇ ਜੋ ਕੁਝ ਆ ਉਤਸ਼ਾਹ ਦਿਖਾਇਆ ਹੈ ਬੱਚਾ ਨੇ ਨੌਜਵਾਨਾਂ ਨੇ ਇਹ ਸੇਵਾ ਭਾਵਨਾ ਮਨ ਦੇ ਵਿੱਚ ਆਈ ਹੈ ਜੋ ਉਹਨਾਂ ਦੇ ਇਹ ਉਦਮ ਸੁਦਰਿੰਦਰ ਸਿੰਘ ਜੀ ਸਿਆਣ ਉਹਨਾਂ ਨੇ ਸੰਗਠਿਤ ਕੀਤਾ ਹੈ ਬੱਚਿਆਂ ਨੂੰ ਤੇ ਇਹ ਸੰਗੀਤ ਦਾ ਜਿਹੜਾ ਪ੍ਰੋਗਰਾਮ ਆਪ ਜੀ ਨੇ ਦੇਖਿਆ ਹੈ ਸੰਖਜਾਨ ਸਿੰਘ ਜੀ ਦੇ ਯਾਦ ਦੇ ਵਿੱਚ ਉਹ ਇੱਕ ਬਹੁਤ ਸ਼ਲਾਘਾਯੋਗ ਇਹ ਉਦਮ ਹੈ ਉਹਨਾਂ ਦਾ ਤੇ ਇਸ ਤਰ੍ਹਾਂ ਸਾਡੇ ਜਿਹੜੇ ਗੁਣੀ ਗਿਆਨੀ ਹੋਏ ਹਨ ਸਾਧੂ ਇਹ ਹਨ ਉਹਨਾਂ ਦੀ ਯਾਦ ਜਿਹੜੀ ਮਨਾਉਣੀ ਹੈ ਇਹ ਬਹੁਤ ਅੱਛੀ ਗੱਲ ਹੈ ਚੰਗਾ ਹੈ ਕਿਉਂਕਿ ਉਹਨਾਂ ਤੋਂ ਸਾਨੂੰ ਬਹੁਤ ਜਿੱਦਾਂ ਸੰਤਾਂ ਨੇ ਹੋਣੇ ਦੱਸਿਆ ਉਹਨਾਂ ਬਾਰੇ ਕਈ ਗੱਲਾਂ ਦਸੀਆਂ ਜਿਹੜੀਆਂ ਸਾਨੂੰ ਨਹੀਂ ਸੀ ਪਤਾ ਪਹਿਲਾਂ ਕਿਸੇ ਨੂੰ ਵੀ ਨਾ ਹੀ ਲਿਖੀਆਂ ਗਈਆਂ ਕਿਤੇ ਉਹ ਇਹ ਉਹਨਾਂ ਨਾਲ ਹੱਟ ਬੀਤੀਆਂ ਹਨ ਜੋ ਉਹਨਾਂ ਨੇ ਦੱਸਿਆ ਹਨ ਆਪ ਜੀ ਨੂੰ ਮੈਨੂੰ ਇਹ ਸਿਰਫ ਇੱਕ ਇੱਕ ਯਾਦ ਹੈ ਉਹਨਾਂ ਦੀ ਉਹਨਾਂ ਦਾ ਜਿਹੜਾ ਵਾਕਿਆ ਅਫਰੀਕਾ ਦੇ ਵਿੱਚ ਹੋਇਆ ਸੀ ਜਿਸ ਤਰ੍ਹਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਉਹਨਾਂ ਦਾ ਜਿਹੜਾ ਸੁਭਾਅ ਸੀ ਬਹੁਤ ਹਾਸੇ-ਮਖੌਲ ਵਾਲਾ ਸੀ ਇਹ ਵੀ ਇੱਕ ਬੜੀ ਹਾਸੇ-ਮਖੌਲ ਵਾਲੀ ਗੱਲ ਹੈ ਜਿਹੜੀ ਉੱਥੇ ਵਾਪਰੀ ਸੀ ਅਫਰੀਕਾ ਦੇ ਵਿੱਚ ਇੱਕ ਵਾਰੀ ਸਾਕੂ ਸੱਚੇ ਪਾਸ਼ਾ ਦਾ ਦੌਰਾ ਸੀ ਸਾਕੂ ਜਗਜੀਤ ਸਿੰਘ ਜੀ ਦਾ ਤੇ ਆਮ ਤੌਰ 'ਤੇ ਸੱਚੇ ਪਾਸ਼ਾ ਜੀ ਬਹੁਤ ਉਹਨਾਂ ਨੂੰ ਇਹ ਜਿਹੜਾ ਸਫਾਰੀ ਦਾ ਹੁੰਦਾ ਸੀ ਉਹ ਸਾਰੀ ਸੰਗਤ ਨਾਲ ਲੈ ਕੇ ਜ਼ਰੂਰ ਸਫਾਰੀ ਜਾਂਦੇ ਹੁੰਦੇ ਸਨ ਤੇ ਸੰਖਜਾਨ ਸਿੰਘ ਜੀ ਤੇ ਹੋਰ ਸੱਜਣ ਕੁਝ ਸਨ ਉਹ ਕਾਰ ਦੇ ਵਿੱਚ ਨਾਲ ਤੇ ਸਾਡੇ ਚਾਚਾ ਜੀ ਦੇ ਲੜਕੇ ਅਜੀਤ ਸਿੰਘ ਪੱਟੀ ਉਹ ਗੱਡੀ ਚਲਾ ਰਹੇ ਸਨ ਤੇ ਆਮ ਤੌਰ ਤੇ ਉਹਨਾਂ ਦੇ ਨਾਲ ਹੀ ਸਫਾਰੀ ਜਾਂਦੇ ਸਨ ਉਹ ਤੇ ਮੁੰਬਾਸੇ ਵੱਲ ਨੂੰ ਜਾ ਰਹੇ ਸਨ ਇੱਕ ਵਾਰੀ ਤੇ ਉਸ ਪਿੱਛੇ ਗੱਡੀ ਦੇ ਵਿੱਚ ਬੈਠੇ ਬੈਠੇ ਬੈਠੇ ਤੇ ਸੰਤਾ ਨੇ ਸੰਖਜਾਨ ਸਿੰਘ ਜੀ ਨੇ ਆਪਣੀ ਦਸਤਾਰ ਲਾ ਲਈ ਤੇ ਉਹ ਆਪਣੇ ਸੰਤਜੀਤ ਸਿੰਘ ਜੋ ਉਹ ਕਹਿੰਦੇ ਕਿ ਵੀ ਸੰਜੀ ਕੀ ਗੱਲ ਤੁਸੀਂ ਦਸਤਾਰ ਲਾ ਕੇ ਬਹਿ ਗਏ ਹੋ ਤੇ ਉਹ ਕਹਿੰਦੇ ਬਾਅਦ ਚ ਵੀ ਤੇ ਲਥੜੀਆਂ ਪਹਿਲਾਂ ਹੀ ਲਾ ਲਵਾਂ ਤੇ ਉਹ ਜਦੋਂ ਥੋੜੀ देर ਬਾਅਦ ਅੱਗੇ ਗਏ ਤੇ ਅੱਗੇ ਪਤਾ ਨਹੀਂ ਗੱਡੀ ਦੇ ਅੱਗੇ ਕੋਈ ਜਾਨਵਰ ਆਇਆ ਜਾਂ ਕੀ ਕੋਈ ਗੱਡੀ ਕਿਸੇ ਨੂੰ ਰੋਕਣ ਦੀ ਉਹਨੇ ਕੋਸ਼ਿਸ਼ ਕੀਤੀ ਨਹੀਂ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਤੇ ਗੱਡੀ ਸਾਰੀ ਘੁੰਮ ਗਈ ਇਸ ਤਰ੍ਹਾਂ ਦੇ ਖੜ ਦੇ ਵਿੱਚ ਖੜ ਦੇ ਵਿੱਚ ਜਾ ਪਈ ਸਾਰੀਆਂ ਦਸਤਾਰਾਂ ਲਾਤੀਆਂ ਗੱਡੀ 'ਚ ਸੋ ਇਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ ਪਹਿਲਾਂ ਤੇ ਨਾਲ ਉਹਨਾਂ ਨੇ ਉਹ ਖਾਲਚੀ ਗੱਲ ਕਰ ਦਿੱਤੀ ਤੇ ਨਾਲੇ ਜਣਾ ਵੀ ਦਿੱਤਾ ਕਿ ਕੀ ਹੋਣਾ ਸੋ ਇਸ ਤਰ੍ਹਾਂ ਇਹ ਮੇਰੇ ਵੀਰ ਬੈਠਿਆ ਮਨਮੋਹ ਸਿੰਘ ਜੀ ਇੱਥੇ ਇਹਨਾਂ ਦੇ ਨਾਲ ਬਹੁਤ ਪਿਆਰ ਉਹਨਾਂ ਦਾ ਰਿਹਾ ਉੱਥੇ ਜਦੋਂ ਸਗੂ ਪ੍ਰਤਾਪ ਸਿੰਘ ਦਾ ਦੌਰਾ ਹੁੰਦਾ ਸੀ ਨਰੋ ਵੀ ਤੇ ਉੱਥੇ 4th ਐਵੇਨਿਊ ਪਾਕ ਲੈਂਡ ਜਿੱਥੇ ਸਬਾਜੀ ਦਾ ਘਰ ਸੀ ਉੱਥੇ ਡੇਰਾ ਹੁੰਦਾ ਸੀ ਤੇ ਉਹਨਾਂ ਨੇ ਜਦੋਂ ਵੀ ਆਉਣਾ ਕਹਿਣਾ ਚੱਲ ਮੋਹਨ ਸਿੰਘ ਆ ਜਾ ਚੱਲ ਚੱਲੀਏ ਗੱਡੀ ਦੇ ਵਿੱਚ ਲਾ ਕੇ ਨਾਲ ਦੋਨਾਂ ਸਾਰੇ ਦੌਰੇ ਕਰਨੇ ਸੋ ਇਸ ਤਰ੍ਹਾਂ ਦਾ ਹੀ ਇਸ ਤਰ੍ਹਾਂ ਦੀਆਂ ਯਾਦਾਂ ਹਨ ਉਹਨਾਂ ਦੀਆਂ ਬਹੁਤ ਅੱਛਾ ਸੁਭਾਅ ਸੀ ਉਹਨਾਂ ਦਾ ਇੱਥੇ ਵੀ ਇਸ ਮੁਲਕ ਦੇ ਵਿੱਚ ਉਹਨਾਂ ਨੇ ਆ ਕੇ ਬਹੁਤ ਕੁਝ ਹੁਨਰ ਕੋ ਸਿੱਖਣ ਨੂੰ ਮਿਲਿਆ ਸਾਰਿਆਂ ਨੂੰ ਸੋ ਮੈਂ ਫਿਰ ਉਸੇ ਪਾਸੇ ਵਾਪਸ ਆਉਣਾ ਜਿਸ ਤਰ੍ਹਾਂ ਬੱਚਿਆਂ ਨੇ ਇਹ ਉਦਮ ਦੱਸਿਆ ਹੈ ਬੱਚੇ ਬਹੁਤ ਸੇਵਾ ਕਰਦੇ ਆں ਤਬਲੇ ਵਿੱਚ ਸਾਰੇ ਸੰਗੀਤਵਾਲ ਵੀ ਉਧਰ ਹੋਰ ਬਾਹਰ ਜਿਸ ਤਰ੍ਹਾਂ ਇਹ ਸਾਰੀ ਸਕ੍ਰੀਨ ਵਗੈਰਾ ਸਾਰਾ ਬੱਚਿਆਂ ਨੇ ਉਦਮ ਕਰਕੇ ਆਪ ਜੀ ਨੂੰ ਦਿਖਾਇਆ ਹੈ ਤੇ ਇਹ ਬਹੁਤ ਅੱਛੀ ਗੱਲ ਹੈ ਤੇ ਲੰਗਰ ਵਿੱਚ ਜਿਹੜੀ ਸੇਵਾ ਹੋਈ ਹੈ ਸਾਰਾ ਇਹ ਭਾਵਨਾ ਚੰਗੀ ਹੋਏ ਤਾਹੀਂ ਸੇਵਾ ਕਰਨ ਨੂੰ ਮਨ ਕਰਦਾ ਹੈ ਸੋ ਸਤਿ ਸੱਚੇ ਪਾਸ਼ਾ ਉਦਮ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦਾ ਬਖਸ਼ਣ ਕਿ ਸਾਡੇ ਮਨ ਦੇ ਵਿੱਚ ਗਲਿਆਂਣਤਾ ਨਾ ਹੋਵੇ ਕਿਸੇ ਲਈ ਪਿਆਰ ਹੋਵੇ ਤੇ ਅਸੀਂ ਸੇਵਾ ਕਰ ਸਕੇ ਪਿਆਰ ਦੇ ਨਾਲ ਜਿਹੜੀ ਸੇਵਾ ਕੀਤੀ ਹੈ ਉਹ ਸਫਲ ਹੈ ਸੋ ਮੈਨੂੰ ਹੁਕਮ ਹੋਇਆ ਸੀ ਕਿ ਮਾਲਾ ਬਾਰੇ ਦੱਸਣਾ ਹੈ ਕਿ ਮਾਲਾ ਜਿਹੜਾ ਹੈ ਮਾਲਾ ਜਿਹੜੀ ਹੈ ਉਹ ਕਿਉਂ ਅਸੀਂ ਕਰਦੇ ਹਾਂ ਤੇ ਇਹ ਕੀ ਹੈ ਆ ਮਾਲਾ ਜਿਹੜੀ ਹੈ ਆਪ ਜੀ ਨੂੰ ਪਤਾ ਹੈ ਸਤਿਗੁਰੂ ਇਹ ਸਗੂ ਰਾਮ ਸਿੰਘ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਸਾਨੂੰ ਉਹਦੀ ਮਾਲਾ ਉੱਥੋਂ ਮਿਲੇ ਹੈ ਅਸਣ ਗੜਵੇ ਪਉਵੇ ਤੇ ਮਾਲਾ ਇਹ ਸਗੋਂ ਰਾਮ ਸਿੰਘ ਦੀ ਕਾਰਡ ਹੈ ਇਹ ਉਥੋਂ ਸਾਰਾ ਕੁਝ ਸਾਨੂੰ ਮਿਲਿਆ ਹੈ ਇਹਦੇ ਵਿੱਚ ਜਿਹੜੇ 108 ਮਣਕੇ ਹਨ ਤੇ ਨਾਲ ਇੱਕ ਇਹ ਜਾਮਨ ਕਹਿੰਦੇ ਹਨ ਇਹਨਾਂ ਨੂੰ ਇਹ ਜਾਮਨ ਰੱਖਿਆ ਸੱਚ ਪਾਤਸ਼ਾਹ ਕਹਿੰਦੇ ਮੈਂ ਜਾਮਨ ਹਾਂ ਜਦੋਂ ਤੁਸੀਂ ਯਾਦ ਕਰੋਗੇ ਮੈਂ ਤੁਹਾਡੇ ਹੰਸ ਸੰਗ ਹਮੇਸ਼ਾ ਸੋ ਮਾਲਾ ਦੇ ਨਾਲ 108 ਮਣਕੇ ਜਿਸ ਤਰ੍ਹਾਂ ਇਹ ਇੱਕ ਇਹਨੂੰ ਜਦੋਂ ਕਰਦੇ ਹਾਂ ਇੱਕ ਮਾਲਾ ਕਰਕੇ ਇਹ ਮਣਕਾ ਅੱਗੇ ਕਰਦੇ ਹਾਂ ਤੇ 108 ਵਾਰੀ ਇਸ ਤਰ੍ਹਾਂ ਇਹ ਮਾਲਾ ਕੇ 108 ਤੋਂ 108 ਵਾਰੀ ਇਸ ਤਰ੍ਹਾਂ ਇਹਨਾਂ ਭਜਨ ਹੋ ਜਾਂਦਾ ਹੈ ਸਾਰਾ ਸੋ ਸਗ ਉਸ ਚ ਨੇ ਇਹ ਇੱਕ ਚਿੰਨ ਹੈ ਸਾਡਾ ਸਿੰਬਲ ਇਹਦੇ ਨਾਲ ਜਿਸ ਤਰ੍ਹਾਂ ਮਾਲਾ ਦੇ ਨਾਲ ਬੈਠ ਕੇ ਨਾਮ ਸਿਮਰਨ ਕਰਦੇ ਆ ਤਾਂ ਸਾਨੂੰ ਯਾਦ ਰਹਿੰਦਾ ਕਿ ਸਾਡੀ ਰਸਨਾ ਹਿਲਣੀ ਚਾਹੀਦੀ ਹੈ ਜਿੰਨਾ ਚਿਰ ਰਸਨਾ ਨਹੀਂ ਹਿਲਦੀ ਨਾਮ ਸਿਮਰਨ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਧਿਆਨ ਜਿਹੜਾ ਉਹ ਵੰਡਿਆ ਜਾਂਦਾ ਕਦੀ ਧਿਆਨ ਕਿਤੇ ਹੋਰ ਚਲ ਜਾਂਦਾ ਕਦੀ ਕਿਤੇ ਹੋਰ ਚਲ ਜਾਂਦਾ ਜਿੰਨਾ ਚਿਰ ਮਾਲਾ ਹੱਥ ਦੇ ਵਿੱਚ ਹੋएगी ਤੁਸੀਂ ਦੇਖੋਗੇ ਕਿ ਰਸਨਾ ਤਾਂ ਹਿਲੇਗੀ ਨਾ ਥੋੜਾ ਧਿਆਨ ਭਾਵੇਂ ਚਲ ਜਾਏ ਹੋਰ ਪਾਸੇ ਪਰ ਰਸਨਾ ਜਰੂਰ ਹਿਲਦੀ ਹੈ ਸੋ ਇਹ ਜਿਹੜਾ ਵੀ ਸાગੁਰਾਂ ਨੇ ਸਾਨੂੰ ਇਹ ਸਾਡੇ ਵਾ ਸਾਡੇ ਪੱਲੇ ਵਾਸਤੇ ਜੋ ਕੁਝ ਦਿੱਤਾ ਹੈ ਮਾਲਾ ਵੀ ਹਨ ਜੋ ਗੜਵੇ ਪਉਵੇ ਆਸਣ ਇਹ ਸਭ ਸાગੁਰਾਂ ਦੇ ਸાગੁਰਾਂ ਦੀ ਬਖਸ਼ੀਆਂ ਹੋਈਆਂ ਚੀਜ਼ਾਂ ਇਹਨਾਂ ਵਾਸਤੇ ਅਸੀਂ ਜ਼ਰੂਰ ਉਦਮ ਕਰਕੇ ਜੇ ਨਹੀਂ ਸਾਡੇ ਕੋਲ ਤਾਂ ਜ਼ਰੂਰ ਰੱਖੀਏ ਬੱਚਾ ਉਹਨਾਂ ਖਾਸ ਕਰਕੇ ਸੋ ਦਾਸ ਬਹੁਤਾ ਸਤਿਮਾਨੀ ਲੰਦਾ ਹਾਂਜੀ ਉਹ ਇੱਕ ਹੋਰ ਚੀਜ਼ ਮੈਨੂੰ ਯਾਦ ਕਰਾਈ ਗਿਆ ਕਿ ਇੱਥੇ ਆਪ ਜੀ ਨੇ ਹੁਣੇ ਸੰਗੀਤ ਦੇ ਵਿੱਚ ਦੇਖਿਆ ਕਿ ਸੰਤ ਖਜਾਨ ਸਿੰਘ ਜੀ ਉਹ ਇੱਕ ਵਿਸ਼ੇਸ਼ ਤੌਰ ਤੇ ਤਬਲੇ ਦੇ ਨਾਲ ਘੁੰਗਰੂ ਕਿਸ ਤਰ੍ਹਾਂ ਯੂਜ਼ ਕਰਦੇ ਸਨ ਨਾਲ ਕੋਈ ਘੁੰਗਰੂ ਵਜਾਉਂਦੇ ਸੀ ਵਿੱਚ ਨਾਲ ਉਹ ਅੱਜ ਕੱਲ ਨਹੀਂ ਦੇਖਿਆ ਗਿਆ ਸਿਰਫ ਨਰਿੰਦਰਪਾਲ ਸਿੰਘ ਜੀ ਇਹ ਵਜਾਉਂਦੇ ਹਨ ਹਾਲੇ ਵੀ ਤਬਲੇ ਨਾਲ ਸਾਨੂੰ ਕਈ ਵਾਰੀ ਉਹਨਾਂ ਦੀ ਯਾਦ ਆਉਂਦੀ ਹੈ ਨਾਲ ਜਦੋਂ ਇਹ ਇਸ ਤਰ੍ਹਾਂ ਦੇ ਘੁੰਗਰੂ ਵਜਾਦੇ ਹਨ ਉਹਨਾਂ ਨੂੰ ਸਿਰਫ ਤਬਲੇ ਦੇ ਨਾਲ ਘੁੰਗਰੂ ਨਹੀਂ ਸੀ ਵਜਾਉਂਦੇ ਢੋਲਕੀ ਦੇ ਨਾਲ ਵੀ ਵਜਾਉਂਦੇ ਹੁੰਦੇ ਸੀ ਵਾਰੇ ਦੇ ਵਿੱਚ ਸੋ ਇਹ ਇੱਕ ਵਿਸ਼ੇਸ਼ ਤੌਰ ਤੇ ਸੰਖ្សਨ ਸਿੰਘ ਜੀ ਦੀ ਇਹ ਖੂਬੀ ਸੀ ਉਹਨਾਂ ਦੀ ਉਹਨਾਂ ਦੀ ਸਗੋਂ ਦੀ ਬਖਸ਼ਿਸ਼ ਦੇ ਨਾਲ ਕਿੰਨੇ ਸਾਲ ਪਤਾ ਨਹੀਂ ਮੇਰੇ ਖਿਆਲ ਸ਼ਾਇਦ ਸੰਤਾ ਆਪਣੇ ਉਸਤਾਜੀ ਨੂੰ ਪਤਾ ਹੋਣਾ ਕਿ ਕਿੰਨੇ ਸਾਲ ਹੋ ਗਏ ਹਨ ਉਹਨਾਂ ਨੂੰ ਇਸ ਪਾਸੇ ਕਈ ਸਾਲ ਮੇਰੇ ਖਿਆਲ ਜਦੋਂ ਜਦੋਂ ਤੋਂ 75 ਸਾਲ ਹੋ ਗਏ ਉਹਨਾਂ ਨੇ ਇਸ ਸੇਵਾ ਕੀਤੀ ਇਸ ਘਰ ਦੀ ਗੁਰੂ ਘਰ ਦੀ 75 ਸਾਲ ਕਹਿਣੇ ਬਹੁਤ ਸੌਖੇ ਹਨ ਤੇ ਇਸ ਇਹ ਸਗੂ ਪ੍ਰਤਾਪ ਸਿੰਘ ਜਦੋਂ ਪਹਿਲਾਂ ਖੁਸ਼ੀਆਂ ਲਈਆਂ ਫਿਰ ਇਹਨਾਂ ਸਗੂ ਸਗੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਲਈਆਂ ਉਹਨਾਂ ਨੇ ਸੋ ਦਾਸ ਇਹਨਾਂ ਕਹਿੰਦਾ ਹੈ ਕਿ ਮਾ ਜੱਚਿਆ ਸਾਸਤਰੀ ਅਕਾ